ਰਾਮ ਰਾਮ ਜਪਤਾ ਨਹੀਂ ਲਫ਼ਜ਼ ਵਰਤੇ ਤੇ ਕਰਤਾ ਵਰਤੇ ਕਰਤਾ ਕਿਉਂ ਵਰਤੇ ਜਪਤਾ ਕਿਉਂ ਵਰਤਿਆ ਇਹਦਾ ਵਸਰਾ ਮੂੰਹ ਨਾਲ ਆ ਰਾਮ ਰਾਮ ਜਿਹੜਾ ਹੁੰਦਾ ਵਿਚਾਰਨ ਕਰਨਾ ਲਿਖਿਆ ਜਿਹੜਾ ਮੂੰਹ ਨਾਲ ਉਚਾਰਨ ਕਰਦਾ ਲਫ਼ਜ਼ ਕੋਈ ਵੀ ਹੋਵੇ ਚਾਹੇ ਉਹ Hindu ਹੋਵੇ Hindu ਰਾਮਨਾਮ ਉਚਰਨ ਮੈਲ ਜਿਹੜਾ ਮੂੰਹ ਨਾਲ ਉਚਾਰਨ ਕਰਦਾ ਲਫ਼ਜ਼ ਚਾਹੇ ਕੋਈ ਵੀ ਬਦਲ ਹੋਵੇ Hindu Sikh ਨਹੀਂ ਹੋਇਆ राम नाम समझ के जेड़ा उच्चारण करदा हो हिंदू है कै ओदी जदा सी लफ्ज वैभव रु बोलले वगैरो लफ्जों नो गुरदास ने पहला मंत्र के हावी बोलतर ओ कहाया 12 च कहाया असल जे योगमत है जेडी टौडे कोल है एक तगड़ी साजिश दे तहत एक पहला बुलंदर जाया गया ਉਹਦੇ ਕਹਾਇਆ ਗਿਆ ਵਾਹਿਗੁਰੂ ਗੁਰਮੰਤਰ ਹੈ ਨਾ ਕਿ ਨਾਮ ਹੈ ਗੁਰਮੰਤਰ ਲਿਖਿਆ ਹੈ ਲਾਉ ਨਹੀਂ ਹੈ ਤੁਸੀਂ ਗੁਰਮੰਤਰ ਨੂੰ ਨਾਮ ਕਨੂੰਣਾ ਲਿਆ ਉਹਨੇ ਦਾ ਗੁਰਮੰਤਰ ਲਿਖਿਆ ਤੁਸੀਂ ਇਹਨੂੰ ਨਾਮ ਕਹਿ ਕੇ ਜਪ ਰਹੇ ਹੋ ਗੁਰਦਾਰ ਦੀਵਾਰਾਂ ਨੂੰ ਰੁਹੇ ਮਨ ਰਹੇ ਹੋ ਸ਼ਾਇਦ ਬਾਜ ਪ੍ਰੈਸ਼ਰ ਪਿਆ ਹੋਵੇ ਬਾਜ ਸਵਾਲ ਉੱਠਿਆ ਹੋਵੇ ਵੀ ਨਾਮ ਜਪਣ ਨੂੰ ਕਹੇ ਮੰਤਰ ਜਾਪ ਨਹੀਂ ਹੈ ਸਾਡਾ ਮੰਤਰ ਮੈਨ ਜੰਤਰ ਮੈਨ ਤੰਤਰ ਮੈਨ ਉਹਨਾਂ ਨੇ ਕਹੇ ਇਹ ਤਾਂ ਨਾਮ ਹੈ ਕੋ ਝੂਠੇ ਦਾ ਕੀ ਹੁੰਦਾ ਨਾਮ ਤੇ ਆਗੇ ਨਾਮ ਤਾਂ ਕਿਹਾ ਹੀ ਨਹੀਂ ਹੋਇਆ ਨਾ ਕੁਰਬਾਨੀ ਤੇ ਨਾਮ ਇਹ ਹੈ ਨਾ ਕੁਰਬਾਨੀ ਬੱਚ ਗਿਆ ਹੈ ਨਾਮ ਕਿਵੇਂ ਨਾਲ ਲਿਆ ਤੁਸੀਂ ਕੀ ਕਰਾਉਣਾ ਤੁਹਾਡੇ ਨਾਲ ਨਾਮ ਨਾਲ ਮੂੰਹ ਨਾਲ ਉਚਾਰਨ ਕਰਨਾ ਹੁੰਦਾ ਉਹਨਾਂ ਦਾ ਜਪਣਾ ਜਪਣ ਕੀ ਹੁੰਦਾ ਜਪਣ ਦਾ ਵੀ ਇੱਕ ਹਰਬਾਣੀ ਚ ਜਪਣ ਦੇ ਉੱਤੇ ਇੱਕ ਖਾਸ ਪੰਕਤੀ ਹੈ ਜਪਣਾ ਹੁੰਦਾ ਕੀ ਹੈ ਬਿਨ ਜੇਬਾ ਦੇ ਜਪੇ ਹਿਆਓ ਹਿਰਦੇ ਚ ਰਾਮ ਨਾਮ ਜਪ ਹਿਰਦੇ ਵਾਂਹੇ ਮੂੰਹ ਵਿੱਚ ਨਹੀਂ ਜਪਣਾ ਹਿਰਦੇ ਵਿੱਚ ਜਪਣਾ ਪੂਰਾ ਪ੍ਰਕਾਸ਼ਨ ਕੋਈ ਨਹੀਂ ਜਪਣਾ ਰਾਮ ਨਾਮ ਜੋ ਜਪੇ ਹਉ ਕੋਈ ਜਾਣੇ ਕਿ ਐਸਾ ਨਾਉ ਨਾਉ ਕੀ ਹੁੰਦਾ ਕੋਈ ਮਰਲਾ ਜਾਣਦਾ ਪਹਿਲਾਂ ਤਾਂ ਪਤਾ ਹੀ ਨਹੀਂ ਲੋਕਾਂ ਨੂੰ ਨਾਉ ਕੀ ਹੁੰਦਾ ਨਾਉ ਕੀ ਹੋਰ ਬਾਣੀ ਦਾ ਕਹਿੰਦੀ ਹੈ ਨਾਮ ਲੈ ਦੁਨੀਆ ਨੂੰ ਪਤਾ ਦੂ ਤੋ ਗੁਰਬਾਣੀ ਨੇ ਨਾਮ ਦੱਸਿਆ ਸੀ ਨਾਮ ਹੁੰਦਾ ਕੀ ਹੈ ਉਹਦਾ ਸੀ ਗੁਰਬਾਣੀ ਤੋਂ ਪੁੱਛਿਆ ਹੀ ਨਹੀਂ ਇਹ ਜਿਹੜਾ ਉਜਾੜਨ ਕਰਨਾ ਵਾਹਿਗੁਰੂ ਵਾਹਿਗੁਰੂ ਇਹ ਜੋਗ ਮਤ ਦਾ ਇੱਕ ਹਿੱਸਾ ਹੈ ਏ ਨੂੰ ਮੰਤਰ ਯਾਦ ਕਰ ਲੈਣਾ ਹਟਿਓਗ ਮੰਤਰ राजयोग है ਰਾਜ ਯੋਗ ਹੈ ਰਾਜ ਹੋ ਗਏਗਾ ਸਾਰੇ ਜਿਹੜੇ ਸਾਂ ਖਿਚ ਲੈਣ ਛੱਡਣਾ ਨਹੀਂ ਬਾਹਰ ਛੱਡਣਾ ਨਹੀਂ ਕਿ ਤੂੰ ਉਸਾਂ ਤੱਕ ਵੀ ਬੰਦ ਕਰ ਲੈਣਾ ਵਾਲਾ ਕਿ ਇਹ ਹੋਵੇ ਜਕਰ ਨੂੰ ਵੀ ਬੰਦ ਕਰ ਲੈਣੇ ਜਦੋਂ ਹਾਰਟ ਤੱਕ ਖੜਾ ਕਰ ਲੈਣਾ ਇਹਨਾਂ ਦੇ ਬਾਹਰੋਂ ਦੇਖੀ ਨਾ ਹਾਰਟ ਹਾਰਟੋਂ ਨਾ ਹੋ ਜਾਂਦਾ ਥੱਲੇੋਂ ਚੱਲਦਾ ਰਹਿੰਦਾ ਪਰ ਉੱਪਰੋਂ ਤੁਹਾਨੂੰ ਧੜਕਣ ਨਹੀਂ ਸੁਣਦੀ ਨਾਉਂ ਬੰਦ ਹੋ ਜਾਂਦੀ ਹੈ ਬਿਲਕੁਲ 당 ਸਾਹ ਛੱਡਣਾ ਉਹ ਉਹ ਰਾਜਯੋਗ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਦਾ ਹੂਗ ਆਪਾਂ ਨੇ ਕੀ ਨੇ ਕਹਿੰਦੇ ਨੇ ਇਹ ਤਾਂ ਆਤਮਾ ਜਾਗ ਗਈ ਜਾਗਣ ਦੀ ਗੱਲ ਉਹ ਵੀ ਕਰਦੇ ਨੇ ਜਾਗਣ ਦੀ ਗੱਲ ਗੁਰਵਾਨੀ ਵੀ ਕਰਦੀ ਕਹਿੰਦੇ ਇਹਦੇ ਨਾਲ ਅੰਦਰਲਾ ਜਾਗ ਪੈਂਦਾ ਫਿਰ ਉਹਨਾਂ ਨੂੰ ਕੋਈ ਪੁੱਛੇ ਅੰਦਰਲਾ ਸੁੱਤਾ ਪਿਆ ਅੰਦਰਲਾ ਤਾਂ ਪਹਿਲੇ ਜਾਗਦਾ ਸਤਗੁਰੂ ਜਾਗਦਾ ਹੈ ਅੰਦਰਲਾ ਦਾ ਪਹਿਲੇ ਜਾਗਦਾ ਸੁੱਤਾ ਦਾ ਬਾਹਰਲਾ ਪਿਆ ਉਹ ਸਰਗੋੜ ਨਰਗੋੜ ਤੇ ਆ ਗਈ ਉਹ ਜਿਹੜੀ ਸਬਕੌਨਸ਼ੀਅਸ ਆਰ ਕੌਨਸ਼ੀਅਸ ਉਹਨਾਂ ਦੀ ਉਲਟ ਹੈ ਉਹਦੇ ਤੇ ਆ ਗਈ ਉਹ ਅੰਦਰਲੇ ਨੂੰ ਸੁੱਤਾ ਪਿਆ ਕਹਿੰਦੇ ਨੇ ਵਾਹ ਨੂੰ ਜਾਗਦਾ ਕਹਿੰਦੇ ਉਹ ਵਾਹ ਸੁੱਤਾ ਪਿਆ ਸੁਪਨਾ ਦੇਖਦਾ ਸੁੱਤਬ ਨਹੀਂ ਪਿਆ ਸੁਪਨਾ ਦੇਖਦਾ ਅੰਦਰਲਾ ਤਾਂ ਜਾਗਦਾ ਸਤਗੁਰੂ ਜਾਗਤਾ ਹੈ ਦਿਓ ਪੂਲੀ ਬਾਰਣੀ ਆਇਓ ਉਹਦੋਂ ਵੀ ਉਲਟਾ ਹੈ ਪਰਵਰਣ ਉਹ ਨਾਲੇ ਰਾਜ ਤੋਂ ਉਲਟ ਗੱਲ ਹੈ ਰਾਜ ਯੋਗ ਹੀ ਹੈ ਸਾਡਾ ਯੋਗ ਰਾਜ ਯੋਗ ਹੈ ਮੰਤਰੀ ਯੋਗ ਨਹੀਂ ਹੈ ਹਾਈ ਯੋਗ ਨਹੀਂ ਹੈ ਸਾਡਾ ਰਾਜ ਯੋਗ ਹੈ ਰਾਜ ਯੋਗ ਕੀ ਹੁੰਦਾ ਹੈ ਰਾਜੇ ਨਾਲ ਜੁਟ ਜਾਣਾ ਯੋਗ ਦਾ ਬੰਦਾ ਜੁਟਣਾ ਰਾਜਾ ਉਹਨਾਂ ਰਾਜਾ ਰਾਜਾ ਕੋਲ ਹਰ ਕੋਈ ਹਰਸਮਾਨ ਨਹੀਂ ਰਾਜਾ ਹਰ ਦੇ ਨਾਲ ਜੁੜਨਾ ਜੁੜੇ ਰਹਿਣਾ ਇਹ ਰਾਜ ਯੋਗ ਹੈ। ਜਿਹੜਾ ਕਰਮ ਨਾਲ ਜੁੜਨਾ ਆਪਣੇ ਮੂਲ ਨਾਲ ਜੁੜਨਾ ਇਹ ਰਾਜ ਯੋਗ ਹੈ। ਬੜੇ ਵੀ ਕਹਿੰਦੇ ਸਭ ਤੋਂ ਵੱਡਾ ਯੋਗ ਇਹ ਰਾਜ ਦਾ ਮਤਲਬ ਹੈ। ਇਹਦੇ ਨਾਲ ਹੀ ਅਨੁਸ਼ੀ ਰਾਜ ਪ੍ਰਾਪਤ ਹੁੰਦਾ ਹੈ। ਰਾਜ ਯੋਗ। ਪ੍ਰਾਪਤ ਹੁੰਦਾ ਰਾਜੋ ਕਹਿੰਦਾ ਤਾਂ ਹੈ ਉਹ ਪਰ ਰਾਜੋਗਰ ਦਾ ਹੁੰਦਾ ਤੇ ਗੁਰਬਾਣੀ ਕਿਸੇ ਹੋਰ ਗੱਲ ਕਰਦੀ ਹੈ ਕੇਂਦਰਤ ਗੁਰਬਾਣੀ ਸਿਰਫ ਜੋਤ ਹੈ ਫਿਰ ਉਹ ਰਾਜੋ ਕਹਿੰਦੇ ਸਭ ਤੋਂ ਵੱਡਾ ਜੋਗਾ ਜਿਹੜੇ ਤਿੰਨੇ ਬਾਕੀ ਉਹ ਤਾਂ ਵੱਡਾ ਸਾਡਾ ਉਹਨਾਂ ਦਾ ਮਨਸਰ ਬਾਹਰ ਲੈ ਉਹਨਾਂ ਦਾ ਬਾਹਰਲੀ ਗੱਲ ਹੈ ਸਾਡਾ ਰਾਜੋ ਤਾਂ ਕਹਿੰਦੇ ਰਾਜੇ ਨਾਲ ਜੋਗ ਉਹ ਰਾਜਾ ਇਹ ਕੀ ਹੈ ਇਹ ਮੰਗਦਾ ਜੀਵਤ ਮੰਗਦਾ ਅਮ ਤੇਰੇ ਪੇਖਾਰੀ ਜੀਓ ਇਹ ਤਾਂ ਪੇਖਾਰੀ ਹੈ ਪੇਖਾਰੀ ਆਪਣਾ ਸਭ ਕੁਝ ਤਨਮਨ ਤਨ ਸੌਂਪ ਕੇ ਰਾਜੇ ਨੂੰ ਉਹਦੀ ਛਾੜੂ ਵਿੱਚ ਚਲਾ ਗਿਆ ਜ਼ਿਆਦਾ ਹੈ ਜਾਇਦਾਦ ਕੋਈ ਨਾ ਰਹਿ ਨੇ ਸੋਬਣੋ ਦਾ ਨਾ ਰਹਿ ਨਵੇਂ ਜਾਇਦਾਦ ਮੈਨੂੰ ਨਾ ਸੁਬਾਣੇ ਨਹੀਂ ਹੋਏਗਾ ਜੇ ਕੁਝ ਕੋਲ ਹੈ ਤਾਂ ਮੈਂ ਤੁਹਾਨੂੰ ਦੱਸਣ ਵਾਸਤੇ ਇਹ ਰੱਖੇ ਕੋਲ ਕੁਝ ਨਹੀਂ ਮੰਗਣ ਦਾ ਮੰਗਣ ਦਾ ਉਦੜ ਬੰਦ ਹੁੰਦਾ ਜਦੋਂ ਕੋਲ ਰੱਖੇ ਨਾ ਕੁਝ ਆਪਣਾ ਆਪਣੀ ਮਕੀਅਤ ਨਾਲ ਰੱਖੇ ਵੀਰ ਕਹਿੰਦਾ ਮੇਰੀ ਨਾ ਛਾਂ ਨਾ ਮੇਰਾ ਨਾ ਹੋਇਆ ਨਾ ਕੌਮਾਂ ਹੈ ਨਾ ਕੋਈ ਜਾਇਦਾਦ ਹੈ ਮੇਰਾ ਕੁਝ ਵੀ ਨਹੀਂ ਕਿਉਂ ਕੰਗਾ ਮਨੋ ਮਟਾਤੀ ਹਰ ਚੀਜ਼ ਮਨੋਂ ਮਨ ਆਪਣੇ ਤੇ ਬੁਰਾ ਮਟਾਣਾ ਬੁਰਾ ਵੀ ਮਨ ਚੋਂ ਮਟਾਉਣਾ ਤੁੰ ਮਨ ਦੇ ਅੰਦਰ ਵੀ ਸਾਰੀ ਹੁੰਦੀ ਹੈ ਨਾ ਚੀਜ਼ਾਂ ਦੀ ਮਨ ਦੇ ਅੰਦਰੋਂ ਹੀ ਮਟਾਉਣੀ ਪੈਂਦੀ ਹਾਂ ਨਾਮ ਕੀ ਹੁੰਦਾ ਹੈ ਮੂੰਹ ਨਾਲ ਜਪਣ ਵਾਲੀ ਚੀਜ਼ ਨਾਮ ਨਹੀਂ ਸਰੀਰ ਦੀ ਇਨਵੋਲਵਮੈਂਟ ਨਾਮ ਜਪਣ ਸਿਰਫ ਕਿੰਨੀ ਹੈ ਪੜਨ ਵੇਲੇ ਉਪਦੇਸ਼ ਤੱਕ ਸੀਮਿਤ ਸੀ ਸੁਣਨ ਤੱਕ ਨਾਮ ਕੀ ਹੁੰਦਾ ਕਿ ਮੈਂ ਸਰੀਰ ਦੀ ਇਨਵੋਲਵਮੈਂਟ ਕਿੰਨੀ ਹੈ ਨਾਮ ਕੀ ਹੈ ਕਿ ਮੈਂ ਜਪਣ ਇੱਥੇ ਤੱਕ ਸਰੀਰ ਦੀ ਇਨਵੋਲਵਮੈਂਟ ਜਾਂ ਨਾਮ ਜਪਣ ਫੈਸਲੇ ਦੀ ਕੋਈ ਲੋੜ ਨਹੀਂ ਦੁੱਧ ਆ ਗਿਆ ਬਾਰੋਂ ਕਿ ਤੋ ਆਇਆ ਗਰੋਂ ਕਾਲਿਆ ਦੇਣੀ ਜਮਾਲਿਆ ਚਾਟੀ ਚ ਪਾ ਲਿਆ ਪਾ ਲਿਆ ਨਾ ਫਿਰ ਡਕਣਾ ਹੈ ਫਿਰ ਉਹਦਾ ਗਾਣਾ ਵਜ ਰਿਹਾ ਦੋ ਜੀ ਕੀ ਸਵਾਲ ਰਹਿ ਗਏ ਬਾਹਰ ਤੱਕ ਇਸ ਵਾਰ ਇਹ ਮਤਾਂ ਚਾਟੀ ਦੇ ਵਿੱਚ ਪਿਆ ਹੋ ਜਦ ਮਟਕੀ ਵਿੱਚ ਸ਼ਬਦ ਆ ਗਿਆ ਫਿਰ ਸਰੀਰ ਦਾ ਕੀ ਰੋਲ ਰਹੀ ਉਹ ਦੁੱਧਾ ਕੋਈ ਪਿੱਛੇ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਉਹਦੇ ਨਾਲ ਕੋਈ ਸਮਝ ਨਹੀਂ ਸਰ ਦੁੱਧ ਸਾਡੇ ਖੋਪਿਆ ਰੇੜਕਣਾ ਆਪਾਂ ਇਹਦੇ ਮੱਖਣ ਕਰਦੇ ਸੋਲ ਵੇਲੇ ਕੰਨਾਂ ਦੀ ਲੋੜ ਸੀ ਸਾਂਣਣ ਵੇਲੇ ਕੰਨਾਂ ਦੀ ਲੋੜ ਸੀ ਲੋੜ ਅਸੀਂ ਉਹਨੂੰ ਆਪ ਮੰਥਨ ਕਰਨਾ ਉਹ ਗੱਲ ਦਾ ਮੰਥਨ ਹੋਵੇ ਉਹ ਸ਼ਬਦ ਦੀ ਵਿਚਾਰ ਕਰਦੇ ਸ਼ਬਦ ਦੀ ਵਿਚਾਰ ਕੀ ਹੁੰਦੀ ਹੈ ਸ਼ਬਦ ਦੀ ਵਿਚਾਰ ਇਹ ਹੁੰਦੀ ਹੈ ਜਿਹੜੀ ਅਸੀਂ ਅੱਜ ਵੀ ਵਿਚਾਰ ਸਮਝ ਰਹੇ ਆ ਉਹ ਸੱਚ ਵਿਚਾਰ ਨਹੀਂ ਸੀ ਉਹ ਖੋਜ ਸੀ ਖੋਜ আর ਵਿਚਾਰ 'ਚ ਫਰਕ ਹੈ ਖੋਜ ਇਹ ਹੁੰਦੀ ਹੈ ਸ਼ਬਦ ਕੀ ਕਹਿ ਰਿਹਾ ਇਹ ਖੋਜ ਹੈ ਜਦ ਕੋਈ ਇਹ ਖੋਜ ਵਿਚਾਰ ਨਹੀਂ ਹੈ ਇਹਨਾਂ 'ਚ ਫਰਕ ਪਾ ਲੈਣਾ ਹੈ ਵਿਚਾਰ ਕੀਏ ਵਿਚਾਰ ਰਿਹਾ ਕਿ ਮਾਨੇ ਨੂੰ ਮੰਨਦਾ ਹੈ ਨਹੀਂ ਮੰਨਦਾ ਜੇ ਵਰਗਾਤ ਕਿ ਨਾ ਮੰਨਦਾ ਬਾਕੀ ਕਿਵੇਂ ਮੰਨੂਗਾ ਵਿਚਾਰ ਇਸ ਦਿਲ ਜਿਹੜਾ ਮੱਖਣ ਸਾਡੇ ਕੋ ਆ ਗਿਆ ਮਾਨ ਨੂੰ ਕਿਉਂ ਨਹੀਂ ਖਾਂਦਾ ਐਕਸੈਪਟ ਕਿਉਂ ਨਹੀਂ ਕਰਦਾ ਜਿਹੜੇ ਸਮਝ ਆ ਗਈ ਉਹਦੇ ਤੇ ਮਾਨ ਪੈਰਾ ਕਿਉਂ ਨਹੀਂ ਦਿੰਦਾ ਇਹ ਵਿਚਾਰ ਕਿਵੇਂ ਤੂੰ ਬਾ ਕੀ ਇਹਦਾ ਰਾਜ ਕਰੀਏ ਕਿਵੇਂ ਇਹਨੂੰ ਬਣਾਉਣਾ ਹੈ ਨਾ ਹਨ ਦੇਖਣਾ ਬਾਜੀ ਹੈ ਪਰਮ ਸਿਆਣਪ ਜੇ ਜੇ ਮਨ ਨਹੀਂ ਮੰਦਾ ਤਾਂ ਇਹਦਾ ਸਾੜਾ ਨਹੀਂ ਛੱਡਣਾ ਚਾਹੀਦਾ ਗੱਲ ਹਾਰ ਜਾਣਾ ਚਾਹੀਦਾ ਇਹ ਮੰਨਦਾ ਨਹੀਂ ਇਹ ਤਾਂ ਹੋਊਗਾ ਨਹੀਂ ਮੰਨਦਾ ਇਹ ਆਦਤ ਹੈ ਕਿਵੇਂ ਬਣੂਗਾ ਇਹ ਵਿਚਾਰ ਕਰਦੇ ਕਿਵੇਂ ਬਣੂਗਾ ਇਹਦੇ ਹਲਕਾ ਤੋਂ ਥੱਲੇ ਕਿਵੇਂ ਆਰ ਬੱਚਾ ਦਵਾਈ ਨਹੀਂ ਲੈਂਦਾ ਉਹ ਗਿਆ ਨਹੀਂ ਇਹ ਕਹਿੰਗਾ ਨਹੀਂ ਲੋਦਾ ਉਹ ਗਿਆ ਨਹੀਂ ਉਹਦੇ ਅੰਦਰ ਲੋਹੇ ਕਿਵੇਂ ਜਾਵੇ ਕਿਵੇਂ ਮੰਨੇ ਇਹ ਵਿਚਾਰ ਜੇ ਨਹੀਂ ਮੰਨੂਗਾ ਤਾਂ ਬਾਈਬਲ ਵਾਲੀ ਨਹੀਂ ਹਟਣੀ lal ke nu lal ke maar enu lal ke de ne lal te thole ban jid sir lal te lobhi ho har kamzori manddi buddhi parakh ke us kamzori tohiye nu lagda ye lal te nu lobh veda dab abna shiro raj da lobh thoda labh lobh patra jehda hai kauhi apna shiro raj di ਅਰੇ ਲੱਖਣਾ ਤੋਰੇ ਫਰਦੰਤ ਇਹਨਾਂ ਵਰਗਾ ਦਾ ਉਹ ਪਰ ਆਹ ਰਾਜ ਨੇੜੀ ਇਹ ਮਿਲ ਜਾਵੇ ਸੰਸਾਰੀ ਦੁੱਖਾਂ ਨੂੰ ਸੁੱਖਾ ਜੁਹਣਾ ਬਰਨਣ ਦੀ ਗੱਲ ਹੈ ਦੁਨੀਆ ਕਰਕੇ ਇਹ ਤਾਂ ਬੜੇ ਬੜੇ ਜਿਹੜੇ ਭਗਤ ਹੋਏ ਨੇ ਸਾਰਿਆਂ ਨਾਲ ਦੁੱਖ ਰਹੇ ਨੇ ਦੁੱਖਾਂ ਨੂੰ ਦੁੱਖ ਨਾ ਮੰਨਣਾ ਹੀ ਦੁੱਖਾਂ ਨੂੰ ਦੁੱਖ ਨਾ ਮੰਨਣਾ ਹੀ ਇੱਕ ਸਿਰ ਲਓ ਪਾਸ ਹੋੜ ਦੀ 10 ਸਾਢੇ ਮਿੰਟ ਦੁਕਾਨੋਂ ਦੁਕਾਨੀ ਜਿਹੜਾ ਮੰਦਾ ਪਾਸ ਹੈ ਇਹ ਦੁਕਾਨੋਂ ਦੁਕਾਨ ਮਿਲਦਾ ਫੇਲਾ ਦੁਕਾਨੋਂ ਦੁਕਾਨ ਅਮਰ ਤੂੰ ਪਾਸ ਹੋ ਜਾਣਾ ਇਹ ਤਾਂ ਸੌਖਾ ਹੈ ਇਹ ਤਾਂ ਸੌਖਾ ਹੀ ਹੈ ਅਗਰ ਇਹ ਦੁਖ ਹੋਵੇ ਬਰਦਾਸ਼ਤ ਹੀ ਨਾ ਕਰਾਂਗੇ ਭੱਜ ਕਿੱਥੇ ਜਾਣ ਜੋ ਕੋਈ ਦੁਖ ਹੁੰਦਾ ਹੈ ਕਟਲੇ ਮੈਂ ਤਾਂ ਕੱਟ ਲੈ ਕੱਟ ਲੋ ਹੋ ਵੀ ਐ ਕੱਟਾਂ ਹੋਊਗੀ ਐ ਖੁਸ਼ੀ ਨਾਲ ਕੱਟ ਲੈ ਤੈਨੂੰ ਕੁਦਰਤ ਸਰਬੱਤ ਇਹ ਦੁੱਖਰੀ ਸੁਖੇ ਐ ਦੇ ਵਿੱਚ ਵੀ ਦੁੱਖ ਪਰ ਸੁਖ ਮਨਾਈ ਇਥੋਂ ਆਵੋ ਦੱਲਾ ਇਸ ਕਰਕੇ ਦੁੱਖ ਨੂੰ ਸੁਖ ਮੰਨੋ ਤੇ ਤੈਨੂੰ ਤਾਂ ਤਹਾਨੂੰ ਦੱਸਦਾ ਨਾ ਹੋਣਾ ਦੁੱਖ ਨੂੰ ਸੁਖ ਮੰਨ ਕੇ ਇਹ ਦੁੱਖ ਦੁੱਖ ਮੰਨੇਗਾ ਕਾ ਵੀ ਲੰਗਣਾ ਹੈ ਕਟਲਾ ਪਹਿਣਾ ਹੈ ਲੋਕ ਨੂੰ ਸੁਖ ਮੰਨੇਗਾ ਕੰਮ ਕਰਨਾ ਪਹਿਣਾ ਲੰਗ ਦੋਹ ਪਾਸੇ ਨਹੀਂ ਜਾਣਾ ਹਰਕਤ ਦਾ ਕੋਈ ਨਹੀਂ ਹੈ ਮਨ ਜੋ ਮਰਜੀ ਉਹ ਟਾਈਮ ਦੁੱਖ ਦੁੱਖ ਰਹਿਣਾ ਹੀ ਹੈ ਕੋਈ ਇਲਾਜ ਨਹੀਂ ਇਸ ਕਰਕੇ ਜਿਹੜੀ ਚੀਜ਼ ਦਾ ਕੋਈ ਇਲਾਜ ਨਹੀਂ ਹੈ ਸਿਆਣੇ ਕਹਿੰਦੇ ਨੇ ਵਟ ਕੈਨ ਨੋਟ ਬੀ ਕਯੂਰਡ ਮਸਟ ਬੀ ਜਿਹੜੀ ਕੀ ਦਾ ਇਲਾਜ ਕੋਈ ਉਹਨੂੰ ਬਰਦਾਸ਼ਤ ਕਰ ਲੈਣਾ ਕਰੁੰਦੀ ਹੈ ਟੱਟ ਲਾ ਗਈ ਤਕਲੀਫ ਹੈ ਰੋਲਾ ਪਾਈ ਜਾਓ ਚਾਹੇ ਚੁੱਪ ਕਰਕੇ ਸਹਲੋ ਤਕਲੀਫ ਤੇ ਤਕਲੀਫ ਹੈ ਉਹ ਰੋਲਾ ਪਾਇਆ ਤੇ ਫਿਰ ਕਿਹੋ ਜਿਹੀ ਕਮਜ਼ੋਰੀ ਜाहिर ਹੁੰਦੀ ਹੈ ਜਿਹੜੇ ਕੱਟ ਲੈਂਦੇ ਨੇ ਉਹ ਲੋਨ ਕੇ ਮਸਲੇ ਨੇ ਬੜਾ ਹੌਸਲੇ ਵਾਲਾ ਦੂਜਿਆਂ ਦੀ ਬਰਦਾਮ ਨਹੀਂ ਤੇ ਲੈ ਜਾਂਦਾ ਰਵੈਦੀ ਤੁ ਜਰੂਰ ਬਣਾ ਮੀ ਰੌਣੀ ਕੋਈ ਬਹੁਤ ਔਖੀ ਗੱਲ ਜੀ ਇਹ ਹੀ ਗੁਰਬਾਨੀ ਨੇ ਕਿਹਾ ਦੁੱਖ ਤੋਂ ਬਾਅਦ ਜੇ ਤੈਨੂੰ ਬੈਨੀਫਿਟ ਹੋਣਾ ਹੈ ਉੱਤਾ ਹੋਣਾ ਇਹ ਦੁੱਖ ਨੂੰ ਤੂੰ ਉਸ दारू ਮੰਨੇ ਦੁੱਖ ਨੂੰ ਵੀ ਉਹਦੀ ਦਾਦ ਮੰਨੇ ਖਣਾ ਧੂਪ ਭੂਖ ਸਦਮਾਰ ਸਦਮਾਰ ਇਹ ਵੀ ਦਾਦ ਇਹ ਵੀ ਇਹਨੂੰ ਦਾਦ ਮੰਨੇ ਫੇਰ ਰੰਗ ਹੋ ਰਹੇ ਹੋ ਅਵਸਥਾ ਹੋ ਰਹੇ ਹੋ ਗੱਲ ਹੋ ਰਹੇ ਹੋ ਬਦਲ ਜੂਗਾ ਦੁੱਖ ਦੁੱਖ ਰਹਿਣੇ ਨਹੀਂ ਤੇਰੇ ਵਾਸਤੇ ਜਦੋਂ ਉਹ ਹੀ ਦੁੱਖ ਦਾਰੂ ਬਣੂ ਜਦੋਂ ਦੁੱਖ ਨੂੰ ਦਾਤ ਬਣ ਲਿਆ ਦਾਤ ਤੇਰੀ ਦਾਤ ਆ ਨੌਵੇਂ ਪਾਸ਼ਾ ਨੇ ਉਸ ਦੁੱਖ ਨੂੰ ਦਾਤ ਬਣਿਆ ਤਦੋਂ ਪਾਸ਼ਾ ਕਹਿੰਦੇ ਠੀਕ ਕਰ ਫੋਲ ਦਲੀਲ ਸਰ ਪਰ ਮੰਗੇ ਦਾਤ ਇਤੋ ਜਹਰ ਹੁੰਦਾ ਵੀ ਦਾਤ ਨੌਵੇਂ ਪਾਸ਼ਾ ਨੇ ਮੰਗੇ ਲਈਏ ਕੀ ਲੋੜ ਸੀ ਕਹਿਣ ਨੂੰ ਉਹ ਕਹਿੰਦੇ ਨੇ ਤੁਸੀਂ ਬਗਾਨੇ ਬਵਾਰੀ ਨੂੰ ਆਪਣੇ ਜਮੇ ਕਿਉਂ ਲੈਣੇ ਥੋੜਾ ਕਿਹੜਾ ਹੈ ਜਿਹੜਾ ਹੋਏਗਾ है। ਤੇਲਕ ਤੁਸੀਂ ਤਾਂ ਲਉਦੇ ਹੀ ਨਹੀਂ ਤੁਸੀਂ ਤਾਂ ਇਹਦੇ ਖਿਲਾਫ ਤੂੰ ਕੀ ਲੋੜ ਹੈ ਗੇਉਣ ਦੀ ਸਰਕਾਰ ਤਾਂ ਕਹਿ ਰਹੀ ਹੈ ਥੋੜਾ ਤਾਂ ਕੋਈ ਮਸਲਾ ਫਿਰ ਵੀ ਬਾਹਰ ਜਿਹਨਾਂ ਦੀ ਪਕੜੀਏ ਸਿਰ ਦੀਜੇ ਬਾਹਰ ਨਾ ਛੋੜੀਏ ਹਾਲਾਗੋ ਗੁਰਮਾਣੀ ਨਹੀਂ ਗੁਰੂਣੀ ਐ ਲੈ ਸਕਦਾ ਕਾਰ ਦਾ ਪ੍ਰਤੀਕ ਹੈ ਪਰ ਉਸ ਵੇਲੇ ਤੇ ਖੰਦ ਸੇ ਮੈਂ ਗੱਲ ਬੜਾਈ ਜਿਵੇਂ ਤਾਂ ਗੱਲ ਬੜਾਈ ਸਿੱਖਾਂ ਨਾਲ ਗੱਲ ਬੜਾਈ ਬਾਹਰ ਜਿਹਨਾਂ ਦੀ ਪਕੜੀਏ ਸਿਰ ਦੀਜੇ ਬਾਹਰ ਛੋੜੀਏ ਤੇ ਇੱਕ ਵਾਹਦਰ ਬੋਲਿਆ ਘਰ ਪਈਏ ਧਰਮ ਨਾ ਛੋੜੀਏ ਤੇ ਉਹ ਵਾਹਦਰ ਜਵਾਬ ਸੀਗਾ ਉੱਥੇ ਜਿਹੜਾ ਕਿਸੇ ਹੋਰ ਨੇ ਦੱਸਿਆ ਸਾਡੇ ਅਸੀਂ ਪਹੁੰਚ ਗਏ ਆਪਾਂ ਇਸ ਕਾਇਰ ਦੇ ਅੱਗੇ ਹੁਣ ਉਹ ਨਾ ਕਹਿ ਬੈਠੇ ਅਸੀਂ ਬਚਨ ਦੇ ਬੈਠੇ। ਉਹ ਜਿਹੜਾ ਦੇਖ ਕੇ ਨੁਕਰ ਜਾਂਦਾ ਕੱਚਾ ਹੁੰਦਾ। ਕਾਇਰ ਵੀ। ਹਾਂ ਕੱਚਾ ਹੁੰਦਾ। ਅਸੀਂ ਐਂ ਨਹੀਂ ਕਰ ਸਕਦੇ। ਇਹ ਨਹੀਂ ਹੁੰਦਾ ਤੇ ਚੇਨੀ ਨਹੀਂ ਕਰ ਸਕਦੇ। ਇਹਦਾ ਮਤਲਬ ਤਾਂ ਉਹ ਜਾਣ ਕੇ ਲਈ ਹੋਈ ਗੱਲ ਹੈ ਨਾ ਇਹ ਦੁਖ ਲਿਆ ਹੈ। ਸਭ ਤੋਂ ਜਾਂਦਾ ਜਾਣੂ ਰਿਛੇ ਲੈਂਦੇ। ਉਹੀ ਗੱਲ ਕਹਿ ਰਹੇ ਨੇ ਸੰਭਾਚਾ ਠੀਕਰ ਫੋਰ ਦਲੀਲ ਸੇ ਵਿਚਾਰ ਵਿੱਚ ਵੀ ਕੀਤਾ ਪਰ ਆਇਆ ਪਰ ਤੇ ਉਹਦਾ ਅੱਜ ਮੁੱਲ ਕੀ ਪਿਆ ਹੋਇਆ ਹਰ ਹਿੰਦੂ ਇਹ ਗੱਲ ਕਹਿਣ ਨੂੰ ਤਿਆਰ ਹੈ ਕਿ ਸਾਡਾ ਧਰਮ ਜੇ ਵਿਚ ਗੁਰੂ ਤੇਗ ਬਹਾਦਰ ਹੋਇਆ ਇਮਾਨਦਾਰ ਜਿਹੜਾ ਹੈ ਲੋ ਜਿਹੜੇ ਇਮਾਨਦਾਰ ਲੋਕ ਨੇ ਗੱਲ ਮੰਨਦੇ ਨੇ ਕਹਿੰਦੇ ਨੇ ਦੂਏ ਜਿਹੜੇ ਅੰਦਰੋਂ ਨਹੀਂ ਮੰਨਦੇ ਉਹ ਚੁੱਪ ਕਰ ਜਾਂਦੇ ਨੇ ਵਿਰੋਧ ਹੋ ਵੀ ਨਹੀਂ ਕਰਦੇ ਐ ਨਹੀਂ ਕਹਦੇ ਨਹੀਂ ਬਚਾਇਆ ਪਰ ਚੁੱਪ ਕਰ ਜਾਂਦੇ ਸ਼ੇਰਦਿਆਂ ਉਹੀ ਅਸੀਂ ਮੰਨਦੇ ਆ ਉਹਨਾਂ ਦੇ ਦਿਹਾੜੇ ਜਾਲਾ ਮਰੋ ਰਹੇ ਆ ਜਿਨ੍ਹਾਂ ਨੇ ਦੁੱਖ ਨੂੰ दारू ਬਣ ਕੇ ਆਪਣੇ ਤੇ ਬਰਦਾਸ਼ਤ ਕੀਤਾ ਚਾਹੇ ਸਿੰਨਾ ਜਿਨੇ ਉਹ ਪਤ ਜਿਨੇ ਜਹ ਗੁਰੂਆਂ ਜਿਨੇ ਜਹ ਕਿਤੇ ਵੀ ਉਹਨਾਂ ਨੇ ਦੁੱਖ ਨੂੰ ਦਾਤ ਮੰਨਿਆ ਬੱਕੇ ਸਰੀਰ ਦਾ ਰਹਿਣਾ ਨਹੀਂ ਸੀ ਕਿਸੇ ਦਾ ਵੀ ਰਹਿਣਾ ਆਤਵਾ ਦੇ ਜਗਾ ਸਰੀਰ ਦਾ ਵੀ ਬਹੁਤ بڑا ਮੁੱਲ ਪੈ ਗਿਆ ਜਿਹੜਾ ਗੁਰਬਾਣੀ ਵਿੱਚ ਇੱਕ ਪਾਸੇ ਹਜ਼ੂਮਤ ਦੁਨੀਆਂ ਦੀਆਂ ਸਾਰੀਆਂ ਮਤਾਂ ਨੇ ਇੱਕ ਪਾਸੇ ਸਿੱਖ ਬੰਦਾ ਦੁਨੀਆਂ ਦੀਆਂ ਸਾਰੀਆਂ ਮਤਾਂ ਜਿਹੜੀਆਂ ਬਣਾਈ ਹੋਈਆਂ ਨੇ ਦੁਨਿਆਵੀ ਆਦਮੀ ਨੇ ਬਣਾਈ ਹੋਈਆਂ ਇਹ ਜਿਹੜਾ ਮਤ ਹੈ ਇਹ ਮਤ ਕਿਸੇ ਦਾ ਨਹੀਂ ਬਣਾਈ ਹੋਈ ਨਹੀਂ ਇਹ ਦਰਗਾਹ ਦੇ ਪ੍ਰਵਾਨ ਸੁਨਾਮ ਜਪ ਸਿਮਰਨ ਤਪ ਪੂਜਾ ਦਾਨ ਪੁੰਨ ਇਹ ਜਿਹੜੇ ਲਫ਼ਜ਼ ਨੇ ਸਾਡੇ ਖੁੜਾਏ ਨੇ ਧਰਮ ਦੇ ਮੇਰ ਦਰਗਾਹ ਕਿਹੜੇ ਪਰਵਾਨ ਦੇ اور ਦਰਗਾਹ ਬਾਕੀ ਪਰਵਾਨ ਨਹੀਂ ਹਨ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਜਿਹੜਾ ਜਪ ਹੈ ਤਪ ਹੈ ਸਿਮਰਨ ਹੈ ਇਹ ਨਾਮ ਹੈ ਇਹ ਦਾਣਾ ਇਸ਼ਨਾਨ ਹੈ ਤੀਰਥ ਹੈ ਇਹ ਜੁੜੇ ਨੇ ਨਾ ਤਰਮਣ ਸਾਰੇ ਲਫਜ਼ ਇਹਦੇ ਆਲੇ ਤਾਂ ਦਰਗਾਹ ਜੋ ਪਰਵਾਨ ਨੇ ਕਿਉਂ ਬਾਤ ਦਰਗਾਹ ਚ ਆਈ ਹੋਈ ਹੈ ਵੀ ਆਹ ਕਰੋਗੇ ਤਾਂ ਇਹਦਾ ਹੈ ਫਲ कि ये नहीं करोगे और कोई मादों सारी फोकट धर्म पशु फल ना है। बाकी किसी दिन कोई फल लगना ही नहीं कोई द्वाली कौड़ी उठ मोल पेंदा ही नहीं